ਸੇ ਲੋਕ ਮਹੱਲਾ ਤੀਜਾ ਬਾਬੀ ਹਾ ਨਾਮ ਨਾ ਤਰਸਾਏ ਇਹ ਮਨ ਖਸਮ ਕਾ ਹੁਕਮ ਮਨ ਬਾਬੀਏ ਨੂੰ ਕਹਿਆ ਮੰਨੂ ਗਿਆ ਮਨ ਬਾਬੀ ਹੈ ਤੂੰ ਆਇਆ ਦੇ ਪਦਾਰਥਾਂ ਵਾਸਤੇ ਚੀਕ ਪੁਕਾਰਨਾ ਕਰ ਵਿਆਹ ਦੀ ਮੜਿਆ ਤੈਨੂੰ ਆ ਬਣ ਜਿਵੇਂ ਆ ਬਣ ਜਿਵੇਂ ਪ੍ਰਲਾਪ ਮਾਇਆ ਦੀ ਪ੍ਰਾਪਤੀ ਵਾਸਤੇ ਨਾਤਰ ਸਾਇਰ ਬੁੱਧੀ ਨੂੰ ਨਾਤਰ ਵਿਆਲ ਆਕੇ ਦੇਵ ਨੂੰ ਉਹ ਲੈ ਆਕੇ ਤੇ ਇਹ ਮਾਨਾ ਖਸਮ ਦਾ ਹੁਕਮ ਵੰਦ ਤੂੰ ਖਸਮ ਦਾ ਹੁਕਮ ਪਾਣਾ ਮੰਨ ਲੈ ਜੇਲੀ ਤੈਨੂੰ ਲੋੜ ਹੈ ਉਹ ਚੀਜ਼ ਤੈਨੂੰ ਆਪੇ ਮਿਲ ਜਾਂਦੀ ਏ ਆਪਾਂ ਨੂੰ ਨਹੀਂ ਪਤਾ ਇਹ ਸਭ ਵਿਖਿਆ ਹੈ ਇਹ ਭਾਇਆ ਜੰ ਵਿਖਿਆ ਹੈ ਜੈਸਾ ਲੈ ਕੇ ਆਪਾਂ ਉਹ ਮੰਨ ਜਿਹੜਾ ਉਹ ਦਊਗਾ ਉਹ ਤੁਹਾਨੂੰ ਜਿਹੜਾ ਆਪਾਂ ਖਰਮਾ ਦੇਉਂਦੇ ਆਪਣੀ ਵਿਮਾਰੀ ਬਾਝੂ ਹੋਣਾ ਆਹਦੇ ਨਾਲ ਮਤਲਬ ਹੈ ਜੇ ਸਰ ਬਾਝੂਗਾ ਜੇ ਆਪਾਂ ਆਪਣੀ ਮਰਜ਼ੀ ਨਾਲ ਕੋਈ ਮਾਇਆ ਦੀ ਚੀਜ਼ ਪ੍ਰਾਪਤੀ ਕਰਾਂਗੇ ਉਹਦੇ ਨਾਲ ਹੁਕਮ ਉਹਦੇ ਨਾਲ ਵਕਾਰ ਵੱਜਣ ਦੀ ਹਾਂਜੀ ਨਾਨਕ ਹੁਕਮੀ ਮੰਨਿਐ ਹਾਂ ਜੇ ਹੁਕਮ ਅਨੁਸਾਰ ਕੇ ਵਾਇਆ ਗ੍ਰਹਿਣ ਕਰੀਏ ਜੋ ਹੁਕਮ ਨਾ ਮਿਲਦੀ ਹੈ ਉਹੀ ਗ੍ਰਹਿਣ ਕਰੀਏ ਉਹਦੇ ਤੇ ਹੀ ਫਿਰ ਪਰ ਰਹੀ ਖੁਸ਼ੀ ਖੁਸ਼ੀ ਫਿਰ ਤੇ ਖੋਤਰ ਜਾਂਦੀ ਹੈ ਫਿਰ ਤਰੀ ਨਾ ਰਹਿੰਦੀ ਹੋਈ ਨੀ ਚੜਾ ਚ ਬੱਗਣ ਬੱਲ ਪਰ ਹੁੰਦਾ ਜਦ ਦੂਰੋਂ ਰਾਤ ਚੌਗਣਾ ਭੁਤੀ ਦਾ ਰੂਪ ਤੇ ਖੜਦਾ ਮਰ ਦਾ ਰੂਪ ਵਾਰਨ ਚੜਦਾ ਜੋਤ ਵਧਦੀ ਹੈ ਕਿ ਕਾਲਾ ਹੁੰਦਾ ਹੈ ਤਾਂ ਇਹਦਾ ਘਟਦਾ ਜੇ ਸਫੇਦ ਹੁੰਦਾ ਇਹ ਦਵੰਦ ਸਿੱਖਰ ਦਾ ਵੱਧ ਹੈ ਹਾਂਜੀ ਚਵੱਗਣਾ ਹੁੰਦਾ ਵੈਸੇ ਸ਼ਵਰ ਚਵੱਗਲ ਹੈਗਾ ਬੱਚੋ ਬਾਸੀ ਚਵੱਗਲੀ ਅੱਛਾ ਵੈਸੇ ਤਾਂ ਰੋਣਾ ਹੁੰਦਾ ਕਿ ਬੱਗਣ ਵੀ ਆਉਂਦਾ ਚਵੱਗਲ ਵਾਰ ਆਇਆ ਕੋਈ ਅਲਾਈਆ ਚਬਕੜ ਚੋਗਣਾ ਹੁੰਦਾ ਮਾਇਆ ਚ ਮਾਇਆ ਤਾਂ ਪਰ ਚਵਗਲੀ ਹੋਊਗਾ ਕਿਉਂਕਿ ਦਸਾਂ ਨਸ਼ਾਵਾਂ ਦੇ ਵਿੱਚ ਤੇਰਾ ਰੂਪ ਅਦ ਹਾਂਜੀ ਮਹੱਲਾ ਤੀਜਾ ਬਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਹੇ ਫਿਰਾਹੇ ਜਲ ਕੀ ਸਾਰ ਨਾ ਜਾਣ ਹੀ ਤਾਂ ਜਲ ਮੈਂ ਤੇਰਾ ਵਾਸ ਹੈ ਜਲ ਕੀ ਬਜਲੀ ਜਿਹੜੀ ਖਜੂਰ ਉਹ ਤ੍ਰਿਕੁਟੀ ਚੜ ਗਿਆ ਜਲਤਾ ਤੇਰਾ ਅਸੀਂ ਕਾ ਦੇ ਵਿੱਚ ਖਜੂਰ ਦੀ ਜੜਾਂ ਦੇ ਜਲ ਹੈ ਜਲ ਮੈਂ ਤੇਰਾ ਵਾਸ ਹੈ ਹਿਰਦੇ ਵਿੱਚ ਜਲ ਹੈ ਉੱਥੇ ਵਾਸ ਤੇ ਤੇਰਾ ਰਾਮ ਉਤਕਰ ਵਿੱਚ ਤੇਰਾ ਵਾਸ ਹੈ ਸਰੀਰ ਕਰਕੇ ਜਿਹੜਾ ਸਰੀਰ ਦਾ ਖੂਨ ਪਾਣੀ ਹੈ ਦੇ ਵਿੱਚ ਵੀ ਤੇਰਾ ਵਾਸ ਹੈ ਪਰ ਸਰੀਰ ਵਾਲੇ ਖੂਨ ਦੇ ਵਿੱਚ ਨਾ ਸਿਰ ਤੇਰਾ ਵਾਸ ਹੈ ਨਾ ਉਹਨਾਂ ਚਲ ਤੇਨੂੰ ਤ੍ਰਿਸ਼ਨਾ ਵੀ ਹੈ ਕਾਇਆ ਦੇ ਵਿੱਚ ਜਲ ਹੀ ਮਾਹ ਫਿਰਾਂ ਜਲ ਦੇ ਵਿੱਚ ਫਿਰਦਾ ਨਾ ਜੂਨਾ ਭੋਗਦਾ ਜਲ ਤੇ ਤੈਨ ਭਵਨ ਸਾਜਿਆ ਨਾ ਸਿਰਫ ਉਹਦੇ ਵਿੱਚ ਫਿਰਦਾ ਹੈ ਜਲ ਦੇ ਵਿੱਚ ਹੀ ਫਿਰਦਾ ਜਲ ਕੀ ਸਾਰ ਜਾਣ ਹੀ ਤਾਂ ਤੂੰ ਕੂਕਣ ਪਾਹੇ ਤੈਨੂੰ ਇਹ ਨਹੀਂ ਪਤਾ ਜਲ ਦੋ ਕਿਸ ਬਤਾਇਆ ਆ ਜਿਹੜਾ ਜਲ ਹੈ ਨਾ ਮਾਇਆ ਵਾਲਾ ਇਹ ਜਲ ਨਹੀਂ ਠੀਕ ਹੈਗਾ ਤੈਨੂੰ ਜਲਦੀ ਛਾਰ ਦੀ ਅਸਲੀ ਜਲਦੀ ਛਾਰ ਜੇ ਤੂੰ ਰਾਮ ਉਤਕ ਦੇ ਵਿੱਚ ਫਰਕ ਆ ਜਿਹੜਾ ਪੜੀ ਇਹਦੇ ਵਿੱਚ ਫਰਕ ਸਮਝ ਲੈਦਾ ਫਿਰ ਤੈਨੂੰ ਕੋਕ ਪਕਾੜਨ ਰਾਮ ਉਤ ਉਤਕ ਦੇ ਵਿੱਚ ਤੂੰ ਨਿਵਾਸ ਰੱਖਦਾ ਫਿਰ ਵਿੱਚ ਇਹ ਤਾਂ ਆਪੇ ਹੀ ਲਈ ਜਾਣਾ ਸੀ ਮਾਇਆ ਵਾਲਾ ਤਾਂ ਆਪੇ ਚਲੀ ਜਾਣਾ ਸੀ ਇਹ ਇਹ ਤਾਂ ਤੇਰੇ ਧਿਆਨ ਨਾਲੇ ਕੰਮ ਚੱਲੀ ਜਾਂਦਾ ਹੈ ਇਹ ਤਾਂ ਧਿਆਨ ਲੱਗ ਜਣਾ ਚਲ ਤੇਰਾ ਧਿਆਨ ਇਹਦੇ ਵਿੱਚ ਸਰੀਰ ਤੇ ਉਹਨਾਂ ਜਿ ਧਿਆਨ ਨਾਲੇ ਕੰਮ ਕਰੀ ਜਾਂਦੇ ਨੇ ਜਿਹੜੀ ਇੱਛਾ ਨਾਲੇ ਚੱਲਦਾ ਇਹ ਧਿਆਨ ਨਾਲੇ ਚੱਲਦਾ ਹਾਂਜੀ ਜਲ ਥਲ ਚੋਂ ਦੀ ਸੀ ਵਰਸਦਾ ਭਾਗ ਤਿਨਾ ਕੇ ਜਲ ਦੇ ਨਾਲ ਥਲ ਆਤਾ ਥਲ ਹੀ ਲੱਗਣਾ ਚਾਹੀਦਾ ਇੱਥੇ ਇਹ ਬਲ ਸੀਗਾ ਥਲ ਹੀ ਵਰਸਦਾ ਉਹ ਜਲ ਦਾ ਬਲ ਬਲ ਸਦਾ ਹੈ ਜਿਹੜਾ ਅਮਰਤਵਾਰਸਾ ਆਹ ਜਲ ਬਲ ਹੈ ਬਲ ਮਤਲਬ ਹੈ 36 ਗਿਆਨ ਇਹ ਥੱਲੇ ਆਤਾ ਰੋ ਕੇ ਜਲ ਸਾਲ ਆਮ ਤੌਰ ਤੇ ਹੁੰਦਾ ਇੱਥੇ ਜਲ ਆਇਆ ਹੋਇਆ ਹੈ ਅਮਰਤਵਾਰਸਾ ਉਮਰਤ ਸਾਦੀ ਹੀ ਇਹਦੇ ਨਾਲ ਥਾਲੀ ਲੱਗਣੂ ਜਲ ਬਲ ਉਹ ਬਲ ਦੇ ਨਾਲ ਉਹਨਾਂ ਨੇ ਜਲ ਸਾਲਾ ਥੱਥੇ ਹੀ ਲਾ ਜਲ ਬਲ 14 ਵਰਸਦਾ ਇਕੋ ਨਾਲ ਥਲ ਥਲ ਤੇ ਵਰਸਦਾ ਨਹੀਂ ਹੈ ਵਰਸਦਾ ਵਰਸਦਾ ਕੀ ਹੈ ਫਿਰ ਕੀ ਵਰਸਦਾ ਵਰਸਦਾ ਜਲਦੀ ਹੋਣੀ ਹੈ ਜਲ ਦੇ ਨਾਲ ਥਲ ਵਰਸਦਾ ਜਲੇ ਵਰਸ ਰਿਹਾ ਹਾਂ ਅੱਗੇ ਜਲ ਵਾਲਾ ਹੈ ਨਾ ਜਲ ਵਿੱਚ ਉਹਦਾ ਬਲ ਵਰਸਦਾ ਖੁੱਦ ਬਲ ਬੁੱਧ ਬਲ ਹੀ ਨਾ ਬੁੱਧ ਬਲੇ ਦੇ ਰਿਹਾ ਹੋਰ ਕੀ ਦੇ ਰਿਹਾ ਫੁੱਟਬਾਲ ਨਾਲੇ ਬੰਦ ਕਾਬੂ ਆਉਣਾ ਹੈ ਗੁੱਲ ਜਿੱਤਿਆ ਜਾਣਾ ਚੱਲ ਬਲ ਇਹ ਜਾਲ ਬਲ ਬਲ ਬਸਦਾ ਬੁੱਧ ਬਲ ਬਸਦਾ ਚੌਂਦਸ ਬਰਸਦਾ ਅਪਰਤ ਸਾਲੀ ਬਰਸਦਾ ਗੁੱਜਣ ਗੁੱਜਣ ਹਾਰ ਚੱਲ ਬਲ ਚੌਂਦਸ ਬਰਸਦਾ ਛਾਰੇ ਮਰਸ ਖਾਲੀ ਕੋਥਾ ਨਾ ਕੋਈ ਖਾਲੀ ਜਗ੍ਹਾ ਹੀ ਦੀ ਕੋਈ ਇਰਦਾ ਖਾਲੀ ਦੀ ਜਿੱਥੇ ਨਾ ਬਰਸੇ ਕੋਈ ਕਿਤੇ ਚਲਾ ਜਾਵੇ ਉੱਥੇ ਹੀ ਬਰਸਦਾ ਉੱਠ ਕੇ ਲਾਂਗੋਜ ਦੇ ਉੱਤੇ ਵੀ ਬਰਸਦਾ ਅਕਾਸ਼ ਵਿੱਚ ਹੱਟੇ ਦਾ ਹੀ ਵਰਸਦਾ ਅਕਾਸ਼ ਨਾਲ ਬਸਦਾ ਜੁੜ ਕੇ ਅੱਗੇ ਆ ਗਿਆ ਇੱਥੇ ਜਲ ਵਰਸਦੇ ਇੱਥੇ ਥਲ ਥਲ ਨਾਲ ਆਇਆ ਜੀ ਫਿਰ ਹਾਂਜੀ ਇੱਥੇ ਜਲ ਵਰਸਦਾ ਤਿੱਖ ਮਰਾਂ ਭਾਗ ਤਿਨਾ ਜਲ ਵਰਸਦੇ ਤੇ باوجود ਵੀ ਜਿਹੜੇ ਤਿੱਖ ਮਰੇ ਫਿਰ ਤਾਂ ਭਾਗ ਤਿਨਾ ਕਰਨਾ ਉਹਨਾਂ ਦੇ ਭਾਗ ਦੇ ਵਿੱਚੇ ਫਰਕ ਹੈ ਤਿੱਖ ਮਰਨ ਦਾ ਕੋਈ ਫਰਕ ਨਹੀਂ ਉਸ ਵੇਲੇ ਖੋ ਪ੍ਰਚਾਰ ਹੋ ਰਿਹਾ ਸੀ ਗੁਰਮਤ ਦਾ ਗੁਰੂ ਅਰਦਾਸ ਵੇਲੇ ਪਤਾ ਲੱਗ ਚੁੱਕਾ ਸੀ ਸਭ ਨੂੰ ਵੀ ਹਾਂ ਜਲ ਵਰਸਦਾ ਦੋ ਜਗ੍ਹਾ ਹੀ ਬਦਲ ਰਹੀ ਸੀ ਗੁਰੂ ਦੂਸਰੀ ਜਗ੍ਹਾ ਬਦਲੀ ਗਈ ਗੁਰੂ ਤੇ ਜਿਹੜੀ ਵਾਲੀ ਜਗ੍ਹਾ ਬਦਲ ਗਈ ਉਹ ਵਿਰੋਧ ਵੀ ਕਰਨ ਲੱਗੇ ਸਾਰੇ ਪਤਾ ਲੱਗ ਚੁੱਕਾ ਬੈਠੇ ਭਗਤ ਇਹਨਾਂ ਕਿਹਨਾਂ ਸੀ ਵੀ ਮਾਇਆ ਖਾਤਰ ਬਦਲ ਰਹੇ ਨੇ ਅਰਥ ਭਗਤ ਇਹਨਾਂ ਦੇ ਸਮਝੀ ਨਾਨਕ ਗੁਰਮੁਖੀ ਤਿਨ ਸੋਜੀ ਪਈ ਜਿਨ ਵਸਿਆ ਮਨ ਸਾਨੂੰ ਇਹ ਗੁਰਮਖੀ ਉਹ ਗੁਰਮਖੀ ਉਹ ਗੁਰਮਖੀ ਇਹਨੂੰ ਸੋਝੀ ਪਈ ਸਮਝ ਆ ਗਈ ਉਹਦੇ ਹੱਕ ਹੈ ਉਹਦਾ ਦੇ ਉਹਦਾ ਦੇਣਾ ਤੇ ਲੈਣ ਦੇ ਥੱਕ ਪਾਏ ਸਾਨੂੰ ਲੋੜ ਦੀ ਬੁੱਦਣਾ ਤਾਂ ਨਾਮ ਸੀ ਸੋਝੀ ਪਈ ਆ ਕੁਝ ਨੂੰ ਵੀ ਕੀ ਮੁੱਲ ਨਹੀਂ ਬੁੱਦਣ ਕੀ ਭੁੱਖ ਰੱਖਣੀ ਹੈ ਕੀ ਨਹੀਂ ਰੱਖਣੀ ਜਿਹਨ ਬਸਿਆ ਆਪਣੀ ਜਿਹਨਾਂ ਨੇ ਗੁਰਬਾਨੀ ਦਾ ਗਿਆਨ ਮਨ ਵਿੱਚ ਵਸਾ ਲਿਆ ਸਮਝ ਲਿਆ ਉਹਨਾਂ ਨੂੰ ਗਾਹਾਂ ਦੀ ਸੋਝੀ ਆਈ ਹੈ ਵੀ ਹੁਣ ਕਰਨਾ ਹੈ। ਹਾਂਜੀ। ਕੌੜੀ 나ਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖੀ ਨਾਮ ਧਿਆਏ ਤੁਝੇ ਸਮਾਇਆ। ਕੋਈ ਨਾਥ ਜਤੀ ਸੀ ਸਿੱਧ ਸੀ ਪੀਰ ਸੀ ਇਹਦਾ ਸਾਰਿਆਂ ਨਾਲ ਗੁਰਬਾਣੀ ਦੀ ਚਰਚਾ ਹੋ ਚੁੱਕੀ ਸੀ ਗੁਰੂ ਰੂਪ ਦੀ। ਸਭ ਨੂੰ ਪਤਾ ਲੱਗ ਚੁੱਕਿਆ ਸੀ ਉਸੇ ਦਾ ਹੋਕਾ ਗੁਰੂ ਅੰਗਦ ਦੇ ਦਾ ਉਸੇ ਦਾ ਸਰਚਾਰੇ ਕਰ ਰਹੇ ਨੇ ਗੁਰੂ ਮੰਦਾਲ ਜੀ ਸਾਰਿਆਂ ਨੂੰ ਪਤਾ ਸੀ ਜਿਹੜੀ ਪਿਛਲੀ ਪੰਗਤੀ ਉਹ ਉਹਦੀ ਠੀਕਲੀਅਰ ਕਰਤੀ ਜੋਗੀ ਪੀਰ ਪੀਰ ਮੁਸਲਮਾਨਾਂ ਦੇ ਕਿਨਾ ਅੰਤ ਨਾ ਪਾਇਆ ਉਹ ਤਾਂ ਅੰਤ ਕੋਉਣ ਦੀਆਂ ਗੱਲਾਂ ਕਰਦੇ ਨੇ ਕਿੱਥੇ ਜਾ ਕੇ ਅਸੀਂ ਉੱਚੇ ਤੋਂ ਉੱਚਾ ਚੜ੍ਹ ਉਹੀ ਫਿਰ ਚੜ ਜਾਣਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ ਅੰਤਨ ਪਾਇਆ ਦੇਵ ਮੁਨੀ ਹਾਂਜੀ ਅੱਛਾ ਅੰਤ ਮਾਇਆ ਦਾ ਪਾਉਣਾ ਸੀ ਕਿ ਦਾ ਤਾਂ ਪਾਇਆ ਨਹੀਂ ਜਾ ਸਕਦਾ ਹੈ ਉਹ ਸ਼ੁਰੂ ਹੋ ਜਾਂਦਾ ਬਾਰਡਰ ਮਾਇਆ ਮੁੱਕ ਜਾਂਦੀ ਹੈ ਹਾਂਜੀ ਗੁਰਮੁਖੀ ਨਾਮ ਧਿਆਇ ਤੁਜੇ ਸਮਾਇਆ ਗੁਰਮੁਖੀ ਨੇ ਜਿਹੜੇ ਉਹ ਨਾਮ ਨੇ ਜਿਹੜਾ ਤੇਰਾ ਮੁਕਮਲ ਉਹਦੇ ਧਿਆਨ ਜੋੜ ਲੈਣ ਦੇ ਨੇ ਉਹ ਜਿੱਥੇ ਉਹ ਕਹਿੰਦਾ ਉੱਥੇ ਲੈ ਜਾਂਦਾ ਉੱਥੇ ਜੋੜ ਦਿੰਦਾ ਮੁਕਮਲ ਆਵਾਜ਼ ਜਿੱਥੋਂ ਆਉਂਦੀ ਆਵਾਜ਼ ਦਾ ਚੱਲ ਪਿਆ ਜਿੱਥੋਂ ਆਵਾਜ਼ ਉੱਥੇ ਲੈ ਜਾਂਦੀ ਹੈ ਗੁਬਾਰ ਤਿਸ ਹੀ ਭਾਇਆ ਬਿੰਬ ਅਸਰਾਲ ਤਿਨੇ ਵਰਤਾਇਆ ਇਹਨੇ ਕਹਿੰਦੇ ਨੇ 36 ਜੋਗ ਰਚਨਾ ਨਹੀਂ ਸੀ 36 ਮਹਾਂਮਗੜ ਤੇ ਜੋਗ ਪਤਾ ਹੀ ਨਹੀਂ ਤੇ ਪਤਾ ਹੀ ਨਹੀਂ ਕਿ ਸਾਨੂੰ ਜੋ ਕਹਿੰਦੇ 36 ਜੋਗ ਗੁਬਾਰ ਉਹਦੇ ਬਾਰੇ ਕੋਈ ਜਾਣਦੀ ਕਿ ਕਿੱਡੀ ਦੇ ਪਹਿਲਾਂ ਰਚਨਾ ਸੀ ਕਿੱਡੀ ਦੇ ਲਈ ਰਹੀ ਕਦੋਂ ਰਚਨਾ ਸ਼ੁਰੂ ਹੋਈ ਇਹ ਬਾਰੇ ਕੋਈ ਕਹਿੰਦਾ ਜੋ ਕਿ 36 ਗੁਬਾਰ ਕਿਸੇ ਭਾਇਆ ਉਹ ਪਰਮੇਸ਼ਰ ਨੂੰ ਭੌਂਦਾ ਸੀ ਬਸ ਉਹਨੇ ਗੁਬਾਰੇ ਰਖਿਆ ਉਹ ਦਸਰ ਦੀ ਲੋੜ ਨਹੀਂ ਕਹਿੰਦੇ ਹੁਣ ਤੂੰ ਦੇਖੂ ਜਿਦਕੇ ਤੁਸੀਂ ਬਾਹਰ ਕਬੂਦ ਬਸ ਤੁਸੀਂ ਭਵਸਾਗਰ ਤੋਂ ਬਾਹਰ ਕੰਮਿਕ ਕਰਨਾ ਆਹੀ ਗੱਲ ਰੱਖਣੀ ਹੈ ਤੁਹਾਨੂੰ ਭਵਸਾਗਰ ਕਹਦਾ ਹੋਇਆ ਕਿ ਮੈਂ ਤੁਸੀਂ ਕੀ ਲੈਣਾ ਤੇ ਬਾਹਰ ਨਿਕਲੋ ਫਿਰ ਪਤਾ ਲੱਗ ਜੂ ਇਹ ਬਾਹਰ ਆਇਆ ਨੂੰ ਹਾਂਜੀ ਜਲਾ ਵਿੰਬ ਅਸਰਾਲ ਤਿਨੇ ਪਾਣੀ ਜਲਾ ਹੰ ਅਸਰਾਲ ਆ ਜਲਾ ਬਿਵਦਾਇਆ ਜਿਹੜਾ ਸਰੀਰ ਹੈ ਇਹ ਅਸਰਾ ਬਣਾਇਆ ਹੋਇਆ ਹੈ ਹੌਣ ਪਾਣੀ ਕੀ ਦੇ ਸਰੀਰਾਂ ਜਿਹੜੀ ਹੈ ਇਥੇ ਜਲਾ ਵਿੰਬ ਕਹਿੰਦਾ ਤੇ ਪਾਣ ਪਾਣੀ ਕੀ ਦੇ ਕਹਿੰਦਾ ਤੇਰਾ ਹੀ ਆਸਰਾ ਮਨ ਦੀ ਬੈਠਾ ਹੈ ਕਿਨਾ ਵਰਤਾਇਆ ਇਹ ਤਾਂ ਉਹਦਾ ਵਰਤਾਇਆ ਹੈ ਤੁਹਾਨੂੰ ਕਹਾਂ ਲੈ ਲੋ ਇਹਦੇ ਹਸਦੇ ਨਾਲ ਤੁਸੀਂ ਬਾਹਰ ਨਿਕਲ ਪਰ ਇਹਨੂੰ ਥੱਲੇ ਛੱਡ ਜਾਣਾ ਆ ਟ੍ਰੇਨ ਫਟੇਲ ਫਾਰਮ ਤੇ ਛੱਡਦੀ ਦੀ ਆ ਬਾਹਰ ਨਿਕਲ ਜੀ ਹਾਂਜੀ ਨੀਲ ਅਨੀਲ ਅਗੰਮ ਸਰਜੀਤ ਸਬਾਇਆ ਅਗਨੁਪਾਈ ਵਾਦ ਕੋਕ ਤੇ ਆਇਆ ਜਿੰਨ ਅਲੀਲ ਅਗਮ ਗਣਤੀ ਅਗਣਤੀ ਤੋਂ ਬਾਹਰ ਗਿਰਤੀ ਬਿਰਤੀ ਤੋਂ ਪਰੇ ਅਗਮ ਹੈ ਜੇ ਗਿਰਤੀ ਬਿਰਤੀ ਪਹ ਜਾ ਫਿਰ ਵੀ ਤੁਸੀਂ ਉਸਰ ਪਾਰ ਹੋਏ ਕਿਉਂ ਅਸਲ ਗੱਲ ਇਹ ਇਹਨੇ ਸਮਝਿਆ ਹੈ ਕੋਈ ਹੋਰ ਹੋ ਤਬੀਲ ਵੀ ਅਸਾਂ ਖਦਾਈ ਦੂਜਾ ਲਫ਼ਜ਼ ਹੈ ਉਹਦੇ ਵਾਸਤੇ ਆ ਗੱਭ ਸਰਜੀਤ ਸੁਭਾਇਆ ਪਸਾਰੇ ਸਰਜੀਤ ਜਿੱਦਾਂ ਆਤਮਾ ਸਰਜੀਤ ਆਤਮਾ ਨੂੰ ਵੇਸ਼ ਚਿਤਾਰ ਰਹੀ ਹਈ ਹੈ ਇਹ ਨਹੀਂ ਬਰਦੀ ਪੁਰਾਣੀ ਨਹੀਂ ਹੁੰਦੀ ਸਰਜੀਤ ਉਹ ਚੀਜ਼ ਹੈ ਜਿਹੜੀ ਪੁਰਾਣੀ ਹੁੰਦੀ ਹੈ ਤੇ ਸਮਝਾ ਲੀਏ ਫਿਰ ਉੱਠ ਖੜਦੀ ਹੈ ਜਾਂ ਉੱਠ ਖੜੀ ਹੀ ਹੋ ਗਈ ਸਰਜੀਤ ਕਹਿੰਦਾ ਉਹਨੂੰ ਜਗਾ ਦੇਣਾ ਅਗਨੁਪਾਈਵਾਦ ਭੁੱਖ ਤੇ ਆਇਆ ਅਗਨੇ ਪਾਈਵਾਦ ਬਾਦ ਬਵਾ ਤੈਨਾ ਪਾਇਆ ਹੋਇਆ ਢਿੱਡ ਦੀ ਭੁੱਖ ਨੇ ਬਾਦ ਬਵਾ ਪਹਿਲਾਂ ਕੀਤਾ ਹੋਇਆ ਹੈ ਭੁੱਖ ਤੇ ਆਇਆ ਦੁੱਖ ਸਰੀਰ ਨੂੰ ਆ ਜਿਹੜਾ ਤਨ ਸੱਚ ਤਨ ਬਾਦ ਬਵਾ ਦੀ ਪਤਾ ਹੈ ਅਗਨੀ ਤ੍ਰਿਸ਼ਨਾ ਦੀ ਗੱਲ ਹੈ ਜੀ ਇਹਨੇ ਬਾਦ ਤੇ ਭੁੱਖ ਤੇ ਆਇਆ ਟਟ ਰਗਦੀ ਕਹਿੰਦੇ ਢਿੱਡ ਦੀ ਭੁੱਖ ਨੂੰ ਔਰ ਟਟਦੀ ਨੇ ਆ ਪਿਆਸ ਨੇ ਆ ਸਾਰੇ ਸਿਆਪੇ ਪਾਇ ਲੈਣ ਜਿਹੜੇ ਲੜਦਲਪ ਚ ਲੱਗਦੇ ਨੇ ਨਸੀਬਾਦੂ ਕਰਦੇ ਛੱਡਦੀ ਦਊਗਾ ਬਦ ਬਦ ਖਤਮ ਨੇ ਹਾਂਜੀ ਦੁਨੀਆ ਕੈ ਸਰਕਾਲ ਦੂਜਾ ਭਾਇਆ ਰੱਖੇ ਰੱਖਣ ਹਾਰ ਜਿਹਨੇ ਸ਼ਬਦ 부ਝਾਇਆ ਦੁਨੀਆ ਕੈ ਸਰਕਾਲ ਇਹ ਦੁਨੀਆ ਹੈ ਕਮਲ ਕਲਦੀ ਹੈ ਪਰ ਦੁਨੀਆ 'ਚ ਜਿਹੜਾ ਜੁੜਿਆ ਉਹਨੇ ਦੀਦ ਗਵਾ ਲਿਆ ਦੀਦ ਗਵਾਇਆ ਦੁਨੀੀ ਤੂੰ ਦੁਨੀੀ ਤੇ ਚੱਲੀ ਸਾਥ ਦੁਨੀਆ ਕੇ ਸਰਕਾਰ ਸਾਥ ਕੇ ਬਈ ਆਉਗੇ ਤੇ ਕਾਲ ਇੱਡੀ ਸਾਹ ਚੱਲਣੀ ਤੂੰ ਮਹਿਕਾ ਜਾਂਦਾ ਰਹਿਣ ਵਾਲਾ ਐ ਕਾਲ ਵਸ ਇਟ ਪਿੰਡਾਲੀ ਟੁੱਟਣ ਵਾਲੀ ਐ ਦੁਨੀਆ ਕੇ ਸਰਕਾਰ ਦੂਜਾ ਪਾਇਆ ਦੂਜਾ ਭਾਵਨਾ ਦੂਜੀ ਭਾਵਨਾ ਐ ਤੈਨੂੰ ਦੁਨੀਆ ਦੀ ਭਾਵਨਾ ਇਹ ਤਾਂ ਦੂਜਾ ਪਾਇਆ ਇਹ ਤੇ ਸਰਤੇ ਕਾਲ ਐ ਕਾਲ ਵਾਲੀ ਕੀ ਤੂੰ ਛੱਡ ਦੇ ਅਕਾਲ ਹੋ ਜਾ ਕਾਲ ਕਾਲ ਵਾਸਾ ਉਹਦੇ ਨੂੰ ਸੰਗਤ ਛੱਡ ਕੇ ਉਹਦਾ ਸਾਥ ਕੇ ਹੀ ਅਕਾਲ ਬਸ ਹੋ ਜਾ ਅਕਾਲ ਹੋ ਜਾ ਇੱਕੋ ਗੱਲ ਹੈ ਕਾਲ ਬਸ ਹੋਇਆ ਵੀ ਅਕਾਲ ਹੈ ਜੇ ਅਕਾਲ ਦੇ ਬਸ ਵਿੱਚ ਚਲਿਆ ਜਾਵੇ ਤਾਂ ਅਕਾਲ ਦੇ ਏਰੀਏ ਚਲੇਗਾ ਤੇ ਕਾਲ ਹੈ ਹੀ ਨਹੀਂ ਹਾਂਜੀ ਰੱਖੇ ਰੱਖਣ ਹਾਰ ਜਿਹਨੇ ਸ਼ਬਦ 부ਝਾਇਆ ਰੱਖਣ ਵਾਲਾ ਲੱਖੂਗਾ ਜੇ ਸ਼ਬਦ ਚਲਿਆ ਜਾਏਗਾ ਰੱਖਣ ਵਾਲਾ ਆਪ ਹੀ ਹੈ ਜੇ ਸ਼ਬਦ 부ਝਾਇਆ ਜਿਹੜਾ ਸ਼ਬਦ ਹੈ ਨਾ ਜਿਹੜਾ ਉਪਦੇਸ਼ ਹੈ ਬੁਝਾਇਆ ਉਹਦੇ ਰੱਖਣਾ। ਤੂੰ ਆਪਣੀ ਵਰਦੀ ਤੋਂ ਉਹਦੀ ਬੁਝ ਸਕਦਾ। ਪਰ ਉਹ ਥੋੜੀ ਜੀ ਲਾਜ਼ਮਦਾ ਹੈ। ਸਹਾਰਾ ਲਾ ਦਿੰਦਾ ਜਿਵੇਂ ਗੱਡੜੀ ਚੱਕਣ ਵਾਲੇ ਨੂੰ ਥੋੜ੍ਹਾ ਜਿਹਾ ਸਹਾਰਾ ਲਾ ਦਈਏ ਨਾ। ਤੇ ਚੱਕ ਦੀ ਯੂਜ਼ ਥੋੜ੍ਹਾ ਸਹਾਰਾ ਲਾ ਦੀ ਚੱਕ ਲੈ। ਤੇ ਬੁਝਣ ਦੇ ਵਾਸਤੇ ਸਾਨੂੰ ਥੋੜ੍ਹਾ ਜਿਹਾ ਸਾਰੇ ਦੀ ਲੋੜ ਹੈ। ਸਾਰਾ ਜਨਜੇ ਲੌਂਗੜੀ ਉਹਨਾਂ ਜਰ ਬੁਝ ਹੁੰਦਾ ਨਹੀਂ। ਸ਼ਬਦੁ ਕੁਝਾਇਆ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ ਜੋਲੇ ਜਿਸ ਨੂੰ ਭੁਜਾਵੇ ਸੋਭ ਚੁਦੀ ਨੇ ਜਿਹਨੂੰ ਸ਼ਬਦ 부ਝਾਤਾ ਹਾਂ ਉਹ ਹੀ ਰਖਦਾ ਉਹ ਬੁਝਾਤਾ ਸ਼ਬਦ 부ਝਾ ਲੈ ਸ਼ਬਦ ਵੀ ਚਲਾ ਗਿਆ ਇੱਥੇ ਨੌਵੀਂ ਪੌੜੀ ਸਮਾਪਤੀ ਹੈ ਜੀ